ਸ੍ਰੀ ਲੋਕ ਮਹੱਲਾ ਪੰਜਵਾਂ ਧੰਸੋ ਰਾਗ ਸੁਰੰਗੜੇ ਆਲਾਪਤ ਸਭ ਤਿਖ ਜਾਏ ਧੰਸੋ ਜੰਤ ਸੁਹਾਵੜੇ ਜੋ ਗੁਰਮੁਖੀ ਜਪਦੇ ਨਾਮ ਉਹ ਰਾਗ ਧੰਨੇ ਜਿਹੜੇ ਨਾਮ ਦੇ ਰੰਗ ਨੂੰ ਪ੍ਰਚਾਰਦੇ ਨੇ ਨਾਮ ਦਾ ਰੰਗ ਸਪਰੇ ਕਰਦੇ ਨੇ ਨਾਮ ਦੇ ਰੰਗ ਚ ਰੰਗਦੇ ਨੇ ਗੁਜੀੜ ਦਾ ਰੰਗ ਚਾੜਦੇ ਨੇ ਜਿਹੜੇ ਰਾਗ ਧੰਦੇ ਅਡੋ ਅਡੋ ਜਿਹੜੇ ਬੋਲੇ ਨੇ ਸਾਰਿਆਂ ਦੇ ਅਡੋ ਅਡਰਾਦਾਂ ਦੇ ਵਿੱਚ ਬਾਣੀ ਹੈ ਸਾਰੇ ਰਾਗਾਂ ਇੱਕੋ ਰੰਗ ਚਾੜਦੇ ਮਤਲਬ ਇਹ ਰਾਗ ਸਾਰੇ ਹੀ ਨੇ ਪਰ ਰੰਗ ਇੱਕੋ ਹੀ ਸੁਰੰਗੜੇ ਨੇ ਸਾਰੇ ਰਾਗ ਇਹ ਗੁਰਬਾਣੀ ਦੇ ਜਿੰਨੇ ਰਾਗ ਨੇ ਸਾਰੇ ਸੁਰੰਗੜੇ ਨੇ ਇੱਕੋ ਰੰਗ ਚਾੜਦੇ ਨੇ ਜਿਹੜੇ ਆਲਾਪ ਕਰਦੇ ਨੇ ਇਹਦਾ ਉਹਨਾਂ ਮਾਇਆ ਦੀ ਭੁੱਖ ਖਤਮ ਹੋ ਜਾਂਦੀ ਹੈ ਆਇਆ ਦੀ ਤ੍ਰੇਨਾ ਚਲੀ ਗਈ ਜਾਂ ਆਇਆ ਦੀ ਭੁੱਖ ਚਲੀ ਗਈ ਗੱਲ ਇੱਕੋ ਹੀ ਐ ਹਾਂਜੀ ਤਨ ਸੋ ਜੰਤ ਸੁਹਾਵੜੇ ਜੋ ਗੁਰਮੁਖੀ ਜਪਦੇ ਨਾਮ ਨੇ ਉਹ ਵੀ ਤਲ ਸੁਹਾਵੜੇ ਨੇ ਜਿਹੜੇ ਗੁਰਮੁਖਾਂ ਵਾਲਾ ਨੋ ਨੇ ਜਿਹੜਾ ਨੋ ਗੁਰਮੁਖ ਜਪਦੇ ਨੇ ਉਹ ਜਪਦੇ ਨੇ ਗੁਰਮੁਖੀ ਨਾਮ ਇੱਕ ਖਾਸ ਨਾਮ ਹੈ ਗੁਰਬਾਣੀ ਵਿੱਚ ਦੋ ਲੋਕ ਵੀ ਜਪਦੇ ਨੇ ਗੁਰੂਆਂ ਕੀ ਨੋ ਵੱਖਰੀ ਕਿਸਮ ਦਾ ਨਾਮ ਹੈ ਜਿਹੜਾ ਗੁਰਬਾਣੀ ਵਿੱਚ ਸਬਾਇਆ ਹੋਇਆ ਹੋਰ ਆ ਗਿਆ ਰਾਮਨਾਮ ਸਾਰੇ ਜਿੰਨੇ ਰਾਮਨਾਮ ਨੇ ਉਹਨਾਂ ਦਾ ਰਾਜਾ ਹੈ ਉਹਨਾਂ ਦੇ ਸਰੋਵੜੀ ਹੈ ਉਹਦੇ ਵਾਸਤੇ ਡੈਫੀਨੇਸ਼ਨ ਹੈ ਰਾਜਾ ਰਾਮਨਾਮ ਉਹਰਾ ਵਿਰਮ ਗਿਆਨ ਨਾਮ ਹੈ ਹਾਂਜੀ ਜਿੰਨੀ ਇੱਕ ਮਨ ਇੱਕ ਆਰਾਧਿਆ ਤਿੰਨ ਸੱਦ ਬਲਹਾਰਾ ਜਾਉ ਜਿੰਨੀ ਇੱਕ ਵਾਰ ਨੇ ਕਾਰਾ ਨੇ ਇੱਕ ਵਾਰ ਇੱਕ ਚਿਤ ਹੋ ਕੇ ਆਦ ਕਰਨ ਦੀ ਨਾਮ ਦੀ ਤੈਨੂੰ ਸੱਤ ਬਲੇ ਹਾਰੇ ਜਾਊ ਉਹਨਾਂ ਨੂੰ ਲੋ ਮਿਲ ਜਾਂਦਾ ਹੁੰਦਾ ਨਾ ਜਿਹੜੇ ਕਮਨ ਦੀ ਕਿਤੇ ਤੋ ਕੇ ਆਦ ਰ ਕਰਦੇ ਨੇ ਉਹਨਾਂ ਨੂੰ ਮਿਲ ਜਾਂਦਾ ਤੈਨੂੰ ਸੱਤ ਬਲੇ ਹਾਰੇ ਫਿਰ ਮਰਦੇ ਨਹੀਂ ਸੱਤ ਬਲੇ ਹਾਰੇ ਧੂੜ ਹਮ ਬਾੰਚ ਕਰਮੀ ਪੱਲੇ ਪਾਏ ਤਿੰਨ ਕੀ ਧੂੜ ਉਹਨਾਂ ਦੇ ਜੋ ਮੂੰਹ ਦੇ ਬੋਲ ਨੇ ਉਹਨਾਂ ਦੇ ਵਿੱਚ ਜੋ ਗਿਆਨ ਉਹ ਧੂੜ ਅਸੀਂ ਬਾਹਂਦੇ ਆ ਗਿਆਨ ਦੀ ਇੱਛਾ ਰੱਖਦੇ ਹਾਂ ਤਿੰਨ ਕੀ ਧੂੜ ਨਾਲ ਮਲਛਦੇ ਹਾਂ ਕਰਮੀ ਪлле ਪਾਏ ਪੱਲੇ ਤਾਂ ਅਸੀਂ ਸਾਡੇ ਅੰਦਰ ਤਾਂ ਇੱਛਾ ਹੈ ਉਹ ਪਰਮੇਸ਼ਰ ਦੀ ਕਿਰਪਾ ਨਾਲ ਹੀ ਪੱਲੇ ਪੈਂਦੀ ਹੈ ਠੀਕ ਹੈ ਢੂੜਦਾ ਭਾਵ ਗਿਆਨ ਹੈ ਜੀ ਜਰ ਕੀ ਆਉਂਦੀ ਜਿਆਦਾ ਆਉਂਦੀ ਹੈ ਵੀ ਮਨ ਮਾਝਿਆ ਜਾਂਦਾ ਗੱਲ ਵਿੱਚ ਜੋ ਗਿਆਨ ਹੈ ਉਹ ਹੀ ਢੂੜ ਠੀਕ ਹੈ ਮਾਝਣ ਦੇ ਸਮਰੱਥ ਹੈ ਬਿਲਕੁਲ ਹਾਂ ਜੋ ਰੱਤੇ ਰੰਗ ਗੋਬਿੰਦ ਕਹਿ ਤਿੰਨ ਬਲਹਾਰੇ ਜਾਉਂ ਜਿਹੜਾ ਗੋਬਿੰਦ ਰੰਗੇ ਗਏ ਮੈਂ ਉਹਨਾਂ ਤੇ ਬਲਿਆ ਜਾ ਕੇ ਕੇ ਸਤਰੇ ਛੋੜਨਾ ਉਹ ਗੋਬਿੰਦ ਹੈ ਗੁਣਵਾਜ ਕਨਵਾ ਗੋਦਾ ਉਹ ਬਿੱਦੂ ਜਿੱਥੇ ਜਾ ਕੇ ਵੀ ਜੁੜ ਕੇ ਟੁੱਟਾਂ ਜਾਂਦੀ ਹਰ ਸੱਜਣ ਮੇਲੋ ਰਾਏ ਆਖਾਂ ਬਿਰਥਾ ਜੀ ਕੀ ਜੇ ਉਹ ਬੰਦ ਮਿਲ ਜਵੇ ਮੈਂ ਆਪਣੇ ਜੀ ਦੀ ਬਿਰਥਾ ਉਹਨੂੰ ਦੱਸਾਂ ਮੈਂ ਆਪਣੀ ਹਾਲਤ ਦੱਸਾਂ ਕੀ ਚਾਹੀਦਾ ਕਿਵੇਂ ਮਿਲੂਗਾ ਕੀ ਅੜਚਣਾਉਂਦੀ ਐ ਕਿਉਂ ਨਹੀਂ ਮੇਰਾ ਮਨ ਟਿਕਦਾ ਕੀ ਕੀ ਸਰਸਜਣ ਮੇਲੋ ਰਾਈ ਉਹ ਅਸਲ ਨੂੰ ਮੈਨੂੰ ਵੀ ਰਾਜਾ ਰਾਮ ਨੂੰ ਬੁਲਾ ਦੇ ਅੱਛਾ ਕੀ ਬਿਰਥਾ ਕੀ ਹੁੰਦੀ ਐ ਜੀ ਮਨ ਵੀ ਬਿਰਥਾ ਮਨ ਬਹੁਤ ਕਾਲਾ ਐ ਹੁਣ ਮਿਲੂ ਬਹੁਤ ਕਾਲੀ ਐ ਘਰ ਜਾ ਬੁਜੋਗ ਜੋ ਪੈਦਾ ਹੋ ਗਿਆ ਜਦ ਤੱਕ ਬਿਰਹਾ ਨਾ ਉਪਜੇ ਬਿਰਹਾ ਪੈਦਾ ਹੋ ਗਿਆ ਬਿਰਹਾ ਪੈਦਾ ਵਿਛੋੜਾ ਨਹੀਂ ਛੱਲਿਆ ਜਾ ਸਕਦਾ ਉਹ ਵਿਰਥਾ ਜੀਵ ਵੀ ਕਹ ਲਈਏ ਬਰਦਾਸ਼ਤ ਨਹੀਂ ਬਹੁਤ ਜਨਮ ਤੇ ਮਾਦੋ ਅਹਿਸਾਸ ਹੋ ਗਿਆ ਯਾਦ ਆ ਗਿਆ ਗੁਰੂ ਪੂਰੇ ਮਿਲਾਇਆ ਜਨਮ ਮਰਨ ਦੁਖ ਜਾਏ ਪੂਰੇ ਗੁਰ ਨੇ ਜਿਹੜਾ ਪੂਰਾ ਗਿਆਨ ਜਾਣਦਾ ਸੀ ਜਿਹਦਾ ਪੂਰਾ ਮੰਤਰ ਸੀ ਜਿਹਨੂੰ ਪੂਰੀ ਸੋਝੀ ਸੀ ਉਹਨੇ ਮਿਲਾਤਾ ਉਹਨੇ ਸਮਝਾਤਾ ਪੂਰਾ ਗਿਆਨ ਦੇਤਾ जिने ਪੂਰਾ ज्ञान ले लिया बलके गुरपुरे में लाया जल वर्ण दुख जाए जल वर्ण तो दुखें खत्म हो गया तो जिजना मिले वो भी तो पूरा गुरे थी बणा वाला दसणा वाला भी पूरा गुर थी तेरे अंदर वाला भी पूरा गुर हो गया जे जानया तो थी जेहा देखो दूसरी देह चे ਠੀਕ ਜਿਹਨੇ ਪੂਰਾ ਗੁਰ ਸਾਧੂਰ ਰੂਪ ਵਿੱਚ ਹੋਵੇ ਜਾਣ ਲਿਆ ਸਮਝ ਲਿਆ ਆਪ ਵੀ ਸਤਗੁਰੂ ਹੀ ਹੈ ਹੁੰਦਾ ਹੈ ਜਿਸ ਜਾਣਿਆ ਸੋ ਤੁਸੀਂ ਜਿਹਾ ਸਾਫ ਸਪਸ਼ਟ ਹੁਕਮ ਰਹੀ ਜਿਹਨੂੰ ਗੁਰਬਾਣੀ ਦਾ ਗਿਆਨ ਸਮਝ ਆ ਗਿਆ ਉਹ ਆਪਣੇ ਆਪ ਚ ਪੂਰਾ ਗੁਰ ਹੋਊਗਾ ਹਾਂਜੀ ਹਾਂਜੀ ਜਿਹਨ ਪੂਰਾ ਟੋਟਲ ਗਿਆਨ ਸਮਝ ਆ ਗਿਆ ਹਰ ਪੱਖ ਤੋਂ ਠੀਕ ਹੈ ਹਾਂਜੀ ਜਨ ਨਾਨਕ ਪਾਇਆ ਅਗੰਮ ਰੂਪ ਅਨੰਤ ਨਾ ਕਾਹੂੰ ਜਾਏ ਨਾਨਕ ਪਾਇਆ ਰਮ ਰੂਪ ਨਾਨਕ ਨੇ ਅਗੰਮ ਰੂਪ ਪਾ ਲਿਆ ਅਗੰਮ ਰੂਪ ਕਿਹਨ ਜਿਹੜਾ ਦਸਿਆ ਨਹੀਂ ਜਾ ਸਕਦਾ ਮਨ ਬੁੱਧੀ ਤੇ ਪਰੇ ਜਿਹੜਾ ਸੋਚਿਆ ਵੀ ਨਹੀਂ ਸੀ ਜਾ ਸਕਦਾ ਇਸੇ ਨੂੰ ਕਿਹ ਸੋਚੇ ਸੋਚਣਾ ਹੋ ਗਈ ਇਹ ਅਗੰਮ ਰੂਪ ਹੈ ਤਾਂ ਸੋਚਿਆ ਵੀ ਨਹੀਂ ਸੀ ਜਾ ਸਕਦਾ ਸੋਚਿਆ ਵੀ ਨਹੀਂ ਸੀ ਗਿਆ ਇਹ ਰੂਪ ਆ ਲਿਆ ਹੁਣ ਅਗੰਮ ਰੂਪ अनंत ना कहूं जाए ਟੁੱਟਦਾ ਉਤੋਂ ਜਿੰਨਾ ਜਦ ਉਹਦੇ ਅੰਦਰ ਭੁੱਖ ਹੈ ਉਨਾ ਚੱਲ ਨਹੀਂ ਛੱਡਦਾ ਥਾਂ ਨਾਲ ਦੀ ਭੁੱਖ ਖਤਮ ਹੋਣੀ ਬੜੀ ਖਤਲਨਾਕ ਹਰ ਵਸਰ ਸਦਾ ਖਵਾਰੀ नाम दी लगनी लगली है, चंगी गल है हाथ होनी गल दा ठीक है।, है जी महला जी मोहल्ला पंचम सो वेला खड़ी तन तन मूरत पलसार, सार तान सो दिन सो संजोगड़ा जित डिठा, गुर दरसार ओ तन वेला है ओ खड़ी वे तन है ਤਨੋ ਘੂਰਤ ਘੂਰਤੋਂ ਨੇ ਪਾਲੋ ਉਹ ਵੇਲਾ ਤਾਂ ਸੀ ਜਦ ਗੁਰੂ ਦੇ ਨਾਲ ਹੋ ਗਿਆ ਸਤਗੁਰੂ ਪਹਿਲਾ ਮੈਨੂੰ ਮਿਲ ਗਿਆ ਦਰਸ਼ਨ ਹੋ ਗਿਆ ਉਹ ਵੇਲਾ ਹੀ ਤਾਂ ਸੀ ਜਦੋਂ ਪਹਿਲਾਂ ਹੀ ਸਮਝ ਆ ਗਈ ਸੁੱਧਰ ਗੱਡ ਗਈ ਗੱਲ ਪਹਿਲੀ ਉਹ ਵੇਲਾ ਹੀ ਤਾਂ ਸੀ ਹਾਂਜੀ ਤਨ ਸੋ ਦਿਨ ਸੋ ਸੰਜੋਗੜਾ ਜਿਤ ਡਿਠਾ ਗੁਰ ਦਰਸਾਰ ਗੁਰਦਾ ਦਰਸ਼ਨ ਕੀਤਾ ਗੁਰਦੀ ਸਮਝਾਉਣ ਲੱਗੀ ਗੁਰਦੀ ਗੱਲ ਦੀ ਨਹੀਂ ਤਾਂ ਵੱਡੇ ਦੋ ਪਾਈਆਂ ਦੇ ਸਮਝ ਚ ਨਹੀਂ ਆਈ ਠੀਕ ਹੈ ਜੀ ਅੱਛਾ ਇਹ ਉਧਰ ਉਹਨੂੰ ਨੇ ਵੰਨੀ ਨਹੀਂ ਉਤਰੀ ਥੱਲੇ ਜਿਹੜੀ ਇਹਨਾਂ ਦੇ ਥੱਲੇ ਉਤਰ ਕੀ ਗੱਲ ਚੋਸ ਰੇਣਾ ਤੇ ਹੋ ਗਿਆ ਉਹਨਾਂ ਤੇ ਨਹੀਂ ਹੋ ਸਰ ਹੋ ਜੀ ਮਨ ਕੀਆਂ ਇੱਛਾ ਪੂਰੀਆਂ ਹਰ ਪਾਇਆ ਅਗੰਮ ਅਪਾਰ ਮੇ ਟੁੱਟਾ ਮੋਹੜਾ ਇਕ ਸੱਚ ਨਾਮ ਆਧਾਰ ਵਰਨੀਆਂ ਜੱਪੂਰੀਆਂ ਸਾਰੀਆਂ ਜੱਪੂਰੀਆਂ ਹੋ ਗਈਆਂ ਬੰਦੀਆਂ ਹਰ ਪਾਇਆ ਗਮ ਪਾਰ ਜਦਾ ਪਾਲਿਆ ਉਹ ਕਹਿੰਦੇ ਵੱਡਾ ਆ ਜੀ ਜਾਇਦਾਦ ਤਾਂ ਆਪਦੀ ਮੇਰੀ ਵੀ ਹੈ ਮੇਰੀ ਉੱਤੇ ਉਹ ਕਹਿੰਦੇ ਸਾਰੀ ਰੱਖ ਲੈ ਭਾਈ ਤੂੰ ਉਹਨਾਂ ਨੇ ਕਹਿੰਦਾ ਜੱਪੂਰੀਆਂ ਹੋ ਗਈਆਂ ਸੀ ਪਹਿਲਾਂ ਹੀ ਨਾਮ ਨਾਲ ਇੱਥਾ ਹੀ ਨਹੀਂ ਸੀ ਇਹ ਕਹਿੰਦੇ ਤੂੰ ਸਾਰਾ ਹੀ ਸੰਭਾਲ ਲੈ ਕੋਤੀ ਜਾਇਦਾਦ ਦੀ ਰੱਖਿਆ ਕਰਨੀ ਹੈ ਬਸ ਇਹ ਜਗਾ ਬਣਾਈ ਹੈ ਉਹ ਕਹਿੰਦਾ ਕੋਈ ਦੀ ਮੈਂ ਕਰੂੰ ਉਹਨੂੰ ਸੀ ਚਲਵਾਇਆ ਤੇ ਆਉ ਸੰਗਤ ਪਹ ਲੰਗ ਤੇ ਆਉਦੀ ਸੰਗਤ ਜਗਾ ਨਾਲ ਜੁੜੀ ਹੋਈ ਸੀ ਬੰਦ ਹੋ ਗਈ ਸੰਗਤ ਸੰਗਤ ਜਾਗ ਤੇ ਨਾਲ ਜਾਂਦੀ ਹੁੰਦੀ ਹੈ ਗੁਰੂ ਗ੍ਰੰਥ ਸਾਹਿਬ ਜਾਗ ਜੋਤ ਦੀ ਕਹੀ ਹੋਈ ਗੱਲ ਜ਼ਰੂਰ ਹੈ ਵਖਰੀ ਰੂਪ ਚ ਬੋਲਾਂ ਬਾਣੀ ਵੀ ਬਣੂਗੀ ਪਰ ਜਾਗ ਤੇ ਆਪ ਨਹੀਂ ਹੈ ਜਾਗ ਦੀ ਜੀਵਨ ਖੁਦ ਜਪੜਾ ਜਾਗਤ ਜੋਤ ਹੈ ਜਾਗਤ ਜੋਤ ਜਿਹਦੇ ਪਹਿਲੇ ਸਬਸਰ ਇੱਕ ਮਿੰਟ ਬੋਲੂ ਮੈਂ ਕਹਿੰਦਾ ਉਹ ਤਾਂ ਜਿਹੜੀ ਜਾਗਦੀ ਰਹਦੀ ਜੋਤ ਹੈ ਉਹ ਵੀ ਆਪਣੀ ਜਿਹੜੀ ਸਦਾ ਜਾਗਦੀ ਉਹ ਜਪੜੀ ਜਾਗਤ ਜੋਤ ਜਿਹੜਾ ਸਾਹ ਲੈਂਦਾ ਉਹ ਜਾਗਤ ਜੋਤ ਹੈ ਠੀਕ ਹੈ ਜੀ ਜਿਹੜਾ ਸਾਤ ਜਾਤ ਜੋਤ ਹੈ ਜੀ ਓਮੇ ਟਟਾ ਮੋਹੜਾ ਇੱਕ ਸੱਚ ਨਾਮ ਆਧਾਰ ਉम्मे ਵੀ ਟੁੱਟ ਗਈ ਵਿਛੜ ਲੱਟਾ ਜੈਦਾ ਛੁੱਟ ਉम्मे ਛੱਡੇ ਬਿਨਾ ਜੈਦਾ ਛੱਡ ਹੁੰਦੀ ਆ ਉਹ ਵੀ ਟੁੱਟ ਗਿਆ ਭਾਈਆਂ ਵਾਲਾ ਛੁੱਟੀ ਦੇਖੀ ਪ੍ਰੀਤ ਜਗਤਨਾ ਸਭ ਸਚਨਾਮ ਦੇ ਆਸਰਾ ਲੈ ਲਿਆ ਬਾਕੀ ਬਾਕੀ ਤਾਂ ਕੋਈ ਆਸਰਾ ਹੈ ਹੀ ਹੋਈ ਨਹੀਂ ਸਕਦਾ ਬਾਕੀ ਆਸਰਾ ਹੋ ਜਨ ਨਾਨਕ ਲੱਗਾ ਸੇਵ ਉਧਰੇ सगल ਸੰਸਾਰ ਜਦ ਆਨਕ ਲੱਗਾ ਸੇਵ ਹਰ ਜਦ ਕਹਿੰਦੇ ਜੇ ਜਾਣਾ ਨਾ ਹਾਂ ਕੋਈ ਵੀ ਜਾਣ ਹੋਵੇ ਮੈਂ ਵੀ ਜਾਣ ਸੀ ਲੱਗਾ ਸੇਵ ਹਰ ਹਰ ਦੀ ਸੇਵਾ ਲੱਗ ਜਾਂਦਾ ਉਧਰੇ ਅਸਲ ਸੰਸਾਰ ਜਿਹੜੇ ਸੇਵਾ ਕਰਦਾ ਸੰਸਾਰ ਉਧਰ ਜਾਂਦਾ ਲੋ ਜੀ ਗੱਲ ਕੀ ਹੋਈ ਤੇਰੇ ਕੀ ਸੇਵ ਸਾਹਿਬ ਸੇਵ ਸੇਵ ਆਹਾ ਗੁਰਬਾਨੀ ਦਾ ਹੀ ਸੇਵ ਹੈ ਬਾਕੀ ਸੇਵ ਦੇ ਜਿਹੜੀ ਸੇਵ ਨੇ ਉਹ ਤੇ ਸੇਵ ਵੋਧ ਖਾਂਦੇ ਨੇ ਟੋکریاں ਹੁੰਦੇ ਨੇ ਵਧੀਆ ਉਹ ਤਾਂ ਉਹ ਸੇਵ ਉਸ ਸੇਵ ਚੋਂ ਜਿਹੇ ਸੇਵ ਖਾਣ ਨੂੰ ਵੀ ਨਾਮ ਵਾਲਾ ਲਖਰੀ ਉੱਦਾ ਬਣਾ ਕੇ ਜੋ ਜੀ ਭਗਤੀ विरले दितियन सौंपे जिस भंडार फिर, विल्दे विल्दे विल्दे जिस आर, फिर पुछ ना लितियन आजडी सदसला एक भक्ति है हर जस काल ना एक भक्ति है चितसला भक्ति बिरले दितियन बिरले बिरले नु ददा है सदसला जिस भंडार फिर पुछ ना लितियन इनु बना सौंप देना ओद पुछदा अपनी भी केना खर्चा करता की ਔਰ ਆਈ ਜਾਂਦਾ ਜਿੰਨਾ ਮਰਜ਼ੀ ਮੁੱਠੀਆਂ ਪਰ ਪਰ ਕੇ ਉਹ ਪਰਵਾਹ ਨਹੀਂ ਕਰਦਾ। ਕੰਨ ਇਹ ਕਿਹੜਾ ਮਖੜਾ। ਬਹੁਤ ਦੇਰ ਤੱਕ ਨਹੀਂ ਕਿਸੇ ਨੇ ਵੜਾਇਆ ਤੂੰ ਚੋਰ ਤੈਨੂੰ ਚੁੱਕਦਾ ਇਹ ਮੋਤੀਆਂ ਨੂੰ ਜਿਵੇਂ ਮਰਜ਼ੀ ਪਏ ਰਹਿਣ। ਕੋਈ ਗੁਰਮੁਖ ਦੀ ਨਗਾ ਪੈ ਜਾਊ ਚੱਕ ਲੈਂਦਾ। ਗੁਰਸਿੱਖ ਕਦਰ ਕਰ ਲੈਂਦੇ ਨੇ। ਹਾਂਜੀ। ਇਸ ਲੱਗਾ ਰੰਗ। ਤੇ ਰੰਗੀ ਰੱਤਿਆਂ ਉਹਨਾਂ ਇਕੋ ਨਾਮ ਆਧਾਰ ਇੱਕਾ ਉਹਨ ਪੱਤਿਆਂ ਤੇ ਰੰਗ ਦੇ ਰੱਤਿਆਂ ਜਿਹਨੂੰ ਰੰਗ ਲੱਗ ਗਿਆ ਰੰਗ ਚੜ ਗਿਆ ਰੰਗਿਆ ਗਿਆ ਰੰਗਣਾ ਉਹਨਾਂ ਇੱਕੋ ਨਾਮ ਆਧਾਰ ਇੱਕਾ ਉਹਨ ਪੱਤਿਆਂ ਬਾਸ ਨਾਮ ਦਾ ਆਧਾਰ ਹੈ ਇੱਕੋ ਦਾ ਖਾਣਾ ਖਾਣਾ ਖਾਣਾ ਪੱਤਾ ਉਹਨਾਂ ਖਾਣਾ ਪੱਤਾ ਲੈ ਕੇ ਜਾਣਾ ਉਹਨਾਂ ਦਾ ਖਾਣਾ ਜੀ ਸੱਚ ਖਾਣਾ ਸੱਚ ਪੈਣ ਉਹ ਹੋਰ ਕੁਝ ਖਾਂਦੇ ਹੀ ਨਹੀਂ ਸੱਚੇ ਬਣਾ ਹੋਰ ਕੋ ਜਨਨ ਨੂੰ ਲੋੜੇ ਨਹੀਂ ਹੋ ਜੀ ਉਹਨਾਂ ਪਿੱਛੇ ਜੱਗ ਪੁੰਚੇ ਹੋ ਗਈ ਉਹਨਾਂ ਹਾਂ ਜੋ ਗਈ ਦੇ ਪਿੱਛੋਂ ਜੱਗ ਵੀ ਦੇ ਪਿੱਛੋਂ ਆਪਾਂ ਨਹੀਂ ਪੁੰਚਦੇ ਜੇ ਕੋ ਖਾਵਾ ਜੇ ਕੋ ਪੁੰਚੇ ਤਸ ਖਾਵਾ ਦੀ ਕਹੀ ਹੋਈ ਗੱਲ ਨੂੰ ਹੋਰ ਸੰਸਾਰ ਵੀ ਬਸਦਾ ਹੈ ਸੰਸਾਰ ਵੀ ਸਮਝਦਾ ਹੈ ਸੰਸਾਰ ਵੀ ਡੜਕਦਾ ਹੈ ਹਜ਼ਮ ਕਰਦਾ ਹੈ ਉਹਨਾਂ ਪਿਆਰਾ ਰੱਬ ਉਹਨਾਂ ਕਿਉਂਗੀ ਰੱਬ ਦੇ ਨਾਲ ਜੋਗ ਹੈ ਉਹਦੇ ਨਾਲ ਪਿਆਰ ਹੈ ਆਪਣੇ ਅੰਦਰ ਜੁੜੇ ਹੋਏ ਨੇ ਅੰਤਰਾਤਮਾ ਨਾਲ ਬਸ ਉਹੀ ਪਿਆਰ ਹੈ ਉਹਨੂੰ ਉਹਨਾਂ ਨਾਲ ਸੰਸਾਰ ਨਾਲ ਕੋਈ ਪਿਆਰ ਨਹੀਂ ਉਹਦੇ ਨਾਲ ਪਿਆਰ ਹੈ ਜਿਹੜਾ ਆਪਣੇ ਆਪ ਨਾਲ ਜੁੜਿਆ ਹੋਇਆ ਉਹ ਪਿਆਰ ਹੈ ਸਾਰਿਆਂ ਨਾਲ ਵੀ ਸਾਰੇ ਕਿਉਂ ਵੀ ਜੁੜਦੇ ਜੁੜ ਜਾਣ ਸਾਰੇ ਜੁੜ ਜਾਣ ਆਪਣੇ ਆਪ ਨਾਲ ਸਾਰੇ ਹੀ ਸੁਖੀ ਹੋ ਜਾਣ ਸਾਰੇ ਹੀ ਸੁਖੀ ਬਸਣ ਇਹ ਵੀ ਪਿਆਰ ਦੀ ਨਿਸ਼ਾਨੀ ਹੈ ਹਮਦਰਦੀ ਵੀ ਨਿਸ਼ਾਨੀ ਹੈ ਜਦ ਤੇ ਜਲੰਦਾ ਰੱਖ ਲੈ ਆਪਣੀ ਕਿਰਪਾ ਧਾਰ ਇਹ ਕੀ ਹੈ ਕਿਥੋਂ ਆਈ ਹੈ ਆਵਾਜ਼ ਇਹ ਪ੍ਰੇਮ ਜੋ ਆਈ ਹੈ ਆਵਾਜ਼ ਹਮ ਦਿਲ ਦੀ ਜੋ ਆਈ ਹੈ ਆਵਾਜ਼ ਪਰ ਕਹਿ ਰਿਹਾ ਜਦ ਤੇ ਜਲੰਦਾ ਰੱਖ ਲੈ ਆਪਣੀ ਕਿਰਪਾ ਧਾਰ ਕਿਰਪਾ ਕਰੇ ਨਾ ਤੇ ਵੀ ਸੋ ਜੀ ਜੀ ਪੁੰਚਣ ਔਰ ਖਾਣ ਵਿੱਚ ਕੋ ਫਰਕ ਹੈ ਜੀ ਜੇ ਕੋ ਖਾਵੇ ਜੇ ਕੋ ਪੁੰਚੇ ਪੁੰਚਾ ਕਰਨਾ ਹੁੰਦਾ ਖਾਣਾ ਖਾਣਾ ਹੁੰਦਾ ਅੱਛਾ ਜੀ जिस मेलिया गुर आए तिनी प्रभ जानिया ओ बल बिहारी तिन जे खसमे पाणीया जा... है सतगुरु ही प्रभु है ओदे न होने उ बालक बालक प्रभु तिन ਓ ਬਲੇਹਾਰੀ ਤੈਨ ਜੇ ਖਸਮੇ ਪਾਣਿਆ ਉਹਨਾਂ ਪ੍ਰੇਮ ਜੇ ਖਸਮ ਨਾਲ ਉਹਨਾਂ ਦਾ ਦੇ ਮੈਂ ਬਲੇਹਾਰੀ ਜੇ ਖਸਮ ਨਾਲ ਤਾਂ ਪ੍ਰੇਮ ਹੈ ਸਾਡਾ ਖਸਮ ਦਾ ਸਾਡੇ ਨਾਲ ਨਹੀਂ ਆ ਜੋ ਗੱਲ ਕੱਤੀ ਹੈ ਕਿਤੇ ਨਾ ਕਿਤੇ ਸਾਡੇ ਪ੍ਰੇਮ ਚ ਸਾਨੂੰ ਕੋ ਹੈ ਕਵੀ ਅਸੀਂ ਲਿਖਿਆ ਜਿਕਾ ਨੇ ਪ੍ਰੇਮ ਕਿਤੇ ਨਾ ਕਿਤੇ ਕਵੀ ਹੈ ਸੇਗਣਾਂ ਕਾਂਦੀ ਉਹਦੇ ਵੱਲੋਂ ਪਾਜ ਹੋਇਆ ਉਹਦਾ ਸਿਰ ਨਾਲ ਜਦ ਹੋਊ ਜਾਂ ਸਾਡੀ ਲੜਕ ਨਿਕਲ ਜੂਗੀ ਹਾਂਜੀ